ਲੋਕ ਮਹਲਾ ਤੀਜਾ ਏ ਸਭ ਕੁਝ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਏ ਲੇਖਾ ਲਿਖਿਆ ਸੋ ਹੋਆ ਪਰਵਾਨ ਇਹ ਸਭ ਕੁਝ ਆਵਣ ਜਾਣ ਹੈ ਇਹ ਆਵਣ ਜਾਣ ਹੈ ਰਹਿਣੇ ਵਾਲੀ ਹੈ ਆਕਾਰ ਜਿਨਾਂ ਆਕਾਰ ਹੈ ਸਭ ਆਵਣ ਜਾਣ ਜਿਨ ਇਹ ਲੇਖਾ ਲਿਖਿਆ ਤੋ ਆ ਪਰਵਾਣ ਲੇਖਾਂ ਨੇ ਕੱਲ੍ਹ ਗਿਆ ਬਲ ਇੱਕ ਤਾਂ ਲੇਖ ਫਸਾਉਣ ਵਾਲਾ ਆਹਨੇ ਕਛ ਲਾਉਣ ਵਾਲਾ ਆਹ ਉੱਪਰ ਵਾਲੇ ਕੱਲ੍ਹ ਗਿਆ ਜੀ ਨੇ ਇਹ ਇਹ ਸਭ ਕਿੱਚ ਆਵਣ ਇਹ ਆਕਾਰ ਜਿੱਤੇ ਇਹ ਲੇਖ ਲਿਖਿਆ ਉਹ ਪਰਵਾਣ ਹੋਇਆ ਦਰਗਾਹ ਜੀ ਜਿਹੜਾ ਲਿਖਿਆ ਮੈਂ ਕੁੱਨ ਕੀਤਾ ਮੈਂ ਪਾਪ ਕੀਤਾ ਉਹ ਵੱਸ ਗਿਆ ਉਹਦੀ ਪਰਵਾਣ ਹੋਇਆ ਇਹ ਕਵਿਦੋ ਕੇ ਸੁਬਤਾ ਹੋ ਗਿਆ ਹੁਣ ਇਹ ਲੇਖਾ ਲਿਖ ਜਾਣਾ ਕੋਏ ਇਹ ਤਾਂ ਕੋ ਬਿਲ੍ਹਾ ਲਿਖੜਾ ਜਾਂਦਾ ਹੈ ਕੋਈ ਬਿਲ੍ਹਾ ਹੀ ਜਾਂਦਾ ਆ ਭਾਵੇਂ ਵੀ ਜਿਹੜਾ ਇਸ ਗੱਲ ਨੂੰ ਮੰਨਦਾ ਹੈ ਕਿ ਆਵਣ ਜਾਣ ਹੈਗਾ ਉਹਦਾ ਲੇਖਾ ਪ੍ਰਮਾਣ ਹੋਣਾ ਹਾਂ ਉਹ ਮੰਨਦਾ ਹੈ ਉਹਦਾ ਬੁੱਲਿਆ ਠੀਕ ਹੈ ਲੇਖਾ ਦਾ ਅੰਦਰ ਨਹੀਂ ਜਾਂਦਾ ਲੇਖਾ ਅਗਲਾ ਕੰਮ ਜਿੱਥੋਂ ਭੇਜਣਾ ਫਿਰਦੇ ਹੀ ਹੁੰਦਾ ठीक है जी नानक जे को आप गणाए दा सो मूर्ख गवार जेको ने पैदा मैले का फेर दूंगा मैं उपाय दास दूंगा और नरैडी बलि कराला जे करदे ने ठग रोज 33 बी ते या कोई संत का अखंड पाठ करा दो आएं होजूगा ओ मूर्ख ਕਿਹੜਾ ਲੇਖੇ ਵਿੱਚ ਦਸਲ ਅਮਦਾਜੀ ਕਰਨੀ ਚਾਹੁੰਦਾ ਮੂਰਖਾ ਗਾਵਾਰ ਹੈ ਉਹ ਤੀਜਾ ਮਨਕੁੰਚਰ ਤੀਲਕ ਗੁਰੂ ਗਿਆਨਕੁੰਡਾ ਜੈ ਖਿੱਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਈ ਉਹ ਪੰਜਾੜਾ ਮੁਰਤਾ ਹੱਥੀਏ ਗੁਰੂ ਆ ਤੀਲਕ ਕਾ ਜਿਹੜਾ ਸਵਾਰੀ ਕਰਦਾ ਉਹਨੂੰ ਡਰਾਈਵ ਕਰਦਾ ਫਾਤੀ ਦਾ ਡਰਾਈਵਰ ਆ ਪੀਲੇ ਕੈਬਿਨ ਇਦਾਂ ਗਿਆਨ ਗੁਰੂ ਆ ਠੀਕ ਹੈ ਗਿਆਨ ਮਿਲਿਆ ਨਾ ਗੁਰਬਾਣੀ ਦਾ ਗਿਆਨ ਤੇ ਕੋਈ ਨਹੀਂ ਦੇ ਤਾਹ ਤੇ ਚੱਲਣਾ ਪੀਲੇ ਗੁਰੂ ਠੀਕ ਹੈ ਉਹ ਗਿਆਨ ਕੁੰਡਾ ਕਿਹੜਾ ਕੁੰਡਾ ਹੁੰਦਾ ਹੈ ਤੇ ਆ ਤੇ ਜੋ ਗਿਆਨ ਮੰਦਾ ਗੁਰਬਾਣੀ ਦਾ ਕੁੰਡਾ ਹੀ ਹੈ ਭਾਈਆ ਕਬ ਗੱਲ ਨਾਲ ਨਹੀਂ ਗੱਲ ਜਾ ਕਿੰਚੇ ਤਹ ਜਾਏ ਚਾਹੇ ਕੁਝ ਰ ਜੇ ਕੁਝ ਵੀ ਹੈ ਉੱਧਾ ਹੋਈ ਹੈ ਜਾਂਦਾ ਉੱਧਰ ਨੂੰ ਹੀ ਆ ਬਤਾ ਕਰੇ ਪੂਰਬ ਕੇ ਤਾਂ ਪਛਮੀ ਲੈ ਜਾਏ ਆਪਣੀ ਪਰਮੈਸ਼ਰ ਨੂੰ ਪਾਉਣਾ ਠੀਕ ਹੈ ਕਿ ਉਹਦੀ ਮਰਜ਼ੀ ਹੋ ਗਈ ਫਿਰ ਤਾਂ ਪਰਮੈਸ਼ਰ ਦਾ ਖੁਦਾ ਦਾ ਸ਼ਰੀਫ ਹੋ ਗਿਆ ਫਿਰ ਤਾਂ ਇਹ ਤਾਂ ਦੋ خدا ਹੋ ਗਏ ਕਰਿਆ ਹਸਤੀ ਕੁੰਡੇ ਬਾਹਰਾ ਫਿਰ ਪਾਏ ਗਿਆਨ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ ਜਿਹੜਾ ਹਸਤੀ ਕੁੰਡਾ ਗਿਆਨ ਦੇ ਕੁੰਡਾ ਨੂੰ ਮਨਜ਼ਾ ਨਹੀਂ ਨਾ ਹੈ ਗਿਆਨ ਦੇ ਕੁੰਡਾ ਨੂੰ ਮਨਜ਼ਾ ਦੀ ਆਪਣੀ ਮਰਜ਼ੀ ਸੋਚਦਾ ਆਪਣੀ ਮਰਜ਼ੀ ਦਾ ਇਹ ਕਰਦਾ ਤਾਂ ਹੈ ਉਹੀ ਹੁੰਦਾ ਤਾਂ ਹੋਈ ਹੈ ਜੋ ਪੀਲ ਕਰਕੇ ਜਾਂਦਾ ਛੜਕਦਾ ਉਸੇ ਜਾਂਦਾ ਰਸਤੇ ਤਾਂ ਉਸੇ ਜਾਂਦਾ ਜਿਹੜੇ ਮੈਂ ਆਪਣਾ ਰਾਜ ਲਾਉਂਦਾ ਜਾ ਕੇ ਆਲੇ ਨਾਲੇ ਨਾ ਆ ਰਿਹਾਦਾ ਆਲੇ ਨਾਲੇ ਸਾਈਡਾਂ ਤੇ ਨਜ਼ਰ ਲੱਗਦਾ ਨਿਗਾਨੀ ਰੱਖਣੀ ਚਾਹੀਦੀ ਵੇਗਾ ਤੇ ਰੱਖੇ ਜੇ ਤੇ ਮਾਲਕ ਕਹਿੰਦਾ ਦਿਨਾ ਆਪਣੇ ਮਾਰਗ ਤੇ ਰੱਖੇ ਜਿੱਥੇ ਨੂੰ ਜਾ ਰਿਹਾ ਬਾਹਰ ਕਰਕੇ ਦੀ ਜਾਂਦਾ ਬੁਰ ਕਰਕੇ ਦੀ ਚੱਲਦਾ ਚਲਾਇਆ ਗੁਜਬੂਰੀ ਕਰਕੇ ਚੱਲਦਾ ਚਲਾਇਆ ਬਸ ਬੁਰ ਕਰਕੇ ਚੱਲਣਾ ਆ ਨਾ ਇਹਦੇ ਵਿੱਚ ਫਰਕ ਹੈ ਜੇ ਜੇ ਗੁਜਬੂਰੀ ਚੱਲਦਾ 2000 ਜਰਬੂਦਾ ਜੇ ਬੁਰ ਕਰਕੇ ਚੱਲਦਾ 2000 ਜਰਬੂਦੀ ਠੀਕ ਹੈ ਚੱਲਦਾ ਚਲਾਇਆ ਹੀ ਐ ਮਹਾਤਮ ਜੇ ਜੇ ਬੁਝਬੂਰੀ ਕਰਕੇ ਚੱਲਿਆ ਉਹ ਜਾਨਵਰ ਕਿ ਬਣ ਕਰਕੇ ਚੱਲੇ ਉਹ ਜਾਨਵਰ ਠੀਕ ਹੈ ਜੀ ਸਵਾਹ ਨਹੀਂ ਦਾ ਬਦਲਿਆ ਸਵਾਹ ਸੱਚਖੰਡ ਵਾਲਿਆਂ ਦਾ ਬੰਨ ਕਰਕੇ ਚੱਲਣਾ ਠੀਕ ਹੈ ਰਾਜੀ ਨਾਲ ਚੱਲਣਾ ਬਹਿ ਜਾ ਰਹਿਣਾ ਹੁਕਮ ਰਜਾਈ ਚੱਲਣਾ ਹੁਕਮ ਰਜਾਈ ਦੀ ਚੱਲਣਾ ਸਿੱਖਿਆ ਹੂੰ ਹੁਕਮ ਰਜਾਈ ਚੱਲਣਾ ਹੀ ਬਾਤ ਕਰਨਾ ਹੈ ਕਸ ਜਦੋਂ ਬਾਸ ਹੋ ਗਿਆ ਇਹ ਜੋ ਸੱਚਖੰਡ ਅਰਦਾਸ ਜਿਹਨੂੰ ਪਾਇਆ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਜਿਹਦੇ ਨੂੰ ਪਾਇਆ ਕੀਤਾ ਉਹਦੇ ਅਗੇ ਅਰਦਾਸ ਕਰਨੀ ਚਾਹੀਦੀ ਹੈ ਉਸੇ ਦੇ ਅਰਦਾਸ ਕਰਨੀ ਚਾਹੀਦੀ ਹੈ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਜਿਹਨੇ ਆਪਣਾ ਸਤਿਗੁਰ ਸੇਵਿਆ ਉਹਨੂੰ ਦਾ ਸਾਰੇ ਫਲ ਬਣ ਕੇ ਪਤਾ ਨਹੀਂ ਕੀ ਚਾਉਂਦਾ ਸਤਗੁਰ ਸੇਵਾ ਦਾ ਹੀ ਫਲ ਮਿਲਦਾ ਇਹਦੀ ਠੀਕ ਹੈ ਜੀ ਆਪਣੀਆਂ ਆਸਾਂ ਆਪਣੀਆਂ ਆਸਾਂ ਇਹਨੂੰ ਫਲ ਨਹੀਂ ਲੈਣ ਦਿੰਦੀਆਂ ਸਤਗੁਰ ਸਾਰੇ ਜੇਲੀਦੀ ਆਪਣੀ ਅਕਲ ਆਪਦੀ ਸੋਚ ਹੈ ਉਹੀ ਵੇਗ ਰਪਾਉਂਦੀ ਹੈ ਸਾਰੇ ਫਲ ਮਿਲਣ ਦੇ ਪਰ ਇਹਨੂੰ ਕੋਈ ਦੱਸਦਾ ਹੀ ਨਹੀਂ ਵੀ ਇਹ ਸਤਗੁਰ ਹੈ ਸਤਗੁਰ ਤਾਂ ਬਾਹਰ ਬੈਠੇ ਜੀ ਜੇ ਕੋਈ ਦੱਸ ਦੇ ਪਰ ਪਰਮਾਯਾ ਤਾਂ ਤਾਂ ਹੀ ਆ ਵੀ ਜਿਵੇਂ ਰਾਧਾ ਸਵਾਮੀ ਕਹਿੰਦੇ ਅਸੀਂ ਮੈਂ ਸਤਗੁਰਾਂ ਹਾਂ ਦੂਸਰੇ ਵੀ ਨਾਮ ਧਾਰੀਏ ਵੀ ਸਤਗੁਰ ਬਣਾਈ ਬੈਠੇ ਆ ਇਹਨੂੰ ਨਹੀਂ ਦੱਸਦੇ ਵੀ ਇਹ ਵੀ ਧਰਮ ਦੀ ਗੱਲ ਕਰਦੀਆਂ ਸਿਆਸੀ ਗਾਂਗ ਦੀ ਗੱਲ ਥੋੜੀ ਕਰਦੀ ਨਹੀਂ ਮੇਰੇ ਅੰਦਰ ਸਤਗੁਰ ਹੈ ਮੈਂ ਪ੍ਰਗਟ ਕਰਨਾ ਇਸ ਗੱਲ ਤੋਂ ਉਹ ਵੰਝਾ ਉਹਨੂੰ ਇਸ ਗੱਲ ਦਾ ਗਿਆਨ ਨਹੀਂ ਉਹ ਜੇ ਗਿਆਨ ਦੇ ਤਬ ਰੱਬ ਜਾ ਬੈਠੂਗਾ ਉਹਦੇ ਨੇ ਜੋ ਤੁਹਾਡੇ ਅੰਦਰ ਸਾਡੇ ਅੰਦਰ ਹੈ ਇਹਨਾਂ ਨੂੰ ਕੋਈ ਨਹੀਂ ਕਹਿੰਦੇ ਆਹ ਚਾਹ ਲੋ ਨੂੰ ਘਾੜੇ ਨੇ ਕੀ ਹਜ਼ਾਰ ਦਰਜੇ ਚਲਦੇ ਨੇ ਤਰਖੀਲਾ ਦੀ ਆਬਾਦੀ ਵੱਧਦੀ ਜਾਂਦੀ ਹੈ ਇਹ ਤਾਂ ਥੋੜਾ ਜਰਦਾ ਹੀ ਨਾ ਇਹਦਾ ਠੰਡ ਭਈ ਇਹਨਾਂ ਨੇ ਸਾਰਾ ਕਮਣਾ ਆ ਜਾਣੇ ਤਾਂ ਆਇਆ ਇਹਨਾਂ ਦੇ ਕੁਝ ਦੀ ਪੱਤੇ ਦੇ ਠੀਕ ਹੈ ਜੀ ਇਲੈਕਸ਼ਨ ਆਇਆ ਫਲਬੀ ਫਲਬੀ ਕੇ ਢੜ ਕੇ ਸਭ ਢੜ ਜਾਣਾ ਇਹਨਾਂ ਸੰਗੀ ਦੁੱਖ ਮਿਟਾਇਆ ਹਰ ਨਾਮ ਹੈ ਜਿਹੜਾ ਹਰਤਾ ਜਿਹੜਾ ਜੱਸ ਹੈ ਗੱਲ ਨਹੀਂ ਹਰ ਹੈ ਤਾਂ ਹੈ ਹਮੇਸ਼ਾ ਰਹਿਣ ਵਾਲਾ ਸਦਾ ਤੇ ਆਇਆ ਉਹਨਾਂ ਨੇ ਸਦਾ ਹੀ ਧਿਆਨ ਰੱਖਿਆ ਹਰ ਕਦ ਜਿ세 ਹੀ ਗਾਇਆ ਹਮੇਸ਼ਾ ਸਾਥ ਜਨਾਂ ਦੇ ਸੰਗ ਦੁੱਖ ਬਟਾਇਆ ਸਦਾ ਜਾਨੀ ਸੰਤਤ ਕੀਤੀ ਹੈ ਸੰਤ ਉਹਨੇ ਸੰਤਤ ਕੀਤੀ ਹੈ ਫਿਰ ਜਿਹੜੇ ਆਪਣੇ ਵਰਗੇ ਤੇ ਉਹਨਾਂ ਦੀ ਸੰਤਤ ਕੀਤੀ ਸਾਰਾ ਦੁੱਖ ਮਟਾ ਲਿਆ ਅਚਿੰਤ ਹਰ ਤਨ ਨੇ ਚਲਾਇਆ ਨਾਣਕ ਪਏ ਅਚੰਤ ਹਾਰ ਤਾਨ ਦੇ ਚਲਾਇਆ ਜਨ ਕਨ ਅਚੰਤ ਪਏ ਹਰ ਤਾਨ ਨਹਿ ਚਲਾਇਆ ਦੇ ਚਲਾਇਆ ਹਰ ਤਾਨ ਮੇਰੇ ਅੰਦਰ ਦੇ ਪੈਦਾ ਕਰ ਦਿੱਤਾ ਪੈਦਾ ਪ੍ਰੇਮ ਜਿਹੜਾ ਬਦਲ ਲੱਗਿਆ ਚੰਲ ਕੇ ਅੱਗੇ ਹੋਰ ਪ੍ਰੇਮ ਬਦਲ ਲੱਗਿਆ ਦੇ ਨਾਲ ਪ੍ਰੇਮ ਵੱਧ ਹੀ ਚਲਾ ਗਿਆ ਠੀਕ ਹੈ ਜੀ